ਪ੍ਰਲੋਕ ਮਹਲਾ ਚੌਥਾ ਸਤਗੁਰ ਧਰਤੀ ਧਰਮ ਹੈ ਇਸ ਵਿੱਚ ਕੋ ਬੀਜੇ ਤੇ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਪਲ ਹਰ ਪਾਏ ਕੋ ਸਾਧੂ ਵਰਗ ਧਰਤੀ ਹਾਂ ਜੀ ਚੰਦਨ ਲੈ ਲਿਆ ਬੋਲਣ ਲਿਆ ਆ ਤੋ ਬੋਲਦੇ ਤਰਤੀ ਦਾ ਸਾਨੂੰ ਤਾਂ ਹੈ ਹਾਂ ਬੋਲਣਾ ਉਹਦੀ ਤਰਤੀ ਤਾਂ ਹੁੰਦਾ ਆਪਣੇ ਉੱਤੇ ਲੱਗਦਾ ਉਹ ਕੋਈ ਲਿਖਦਾ ਹੈ ਉਹ ਆ ਆਪਣੇ ਤੁਸੀਂ ਖੇਲੇ ਲਿਖਦਾ ਹੈ ਜੇ ਵਿਧੀ ਲਿਖਦਾ ਉਹ ਸੁਤੰਤਰੀ ਵਿਧੀ ਲਿਖਦਾ ਕੌਲ ਲੋਚੜਾ ਬੇਸੂ ਦਾ ਅੱਜ ਜੋਰੇ ਵਿੱਚ ਵੀਰ ਦਾ ਕੋਈ ਜੋ ਲਿਖਦਾ ਹੈ ਜੋਰੇ ਵਿੱਚ ਕਮਾਈ ਕਰ ਬੀਜੇ ਤੇ ਆਪਾਂ ਪਾਈ ਉਹ ਇਹ ਉਹ ਸਾਥੀ ਲੋਕਾਂ ਨੂੰ ਕਹਿੰਦੇ ਸਾਥ ਤੇ ਪੜਾਉਗਾ ਆਪਣੇ ਵੀ ਜਿਹੜਾ ਇਸ ਦਾ ਅਤੀਬ ਜਿਹੜੇ ਵਿੱਚ ਦਾ ਇੱਕ ਪੂਰੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਲੋਕ ਹੈ ਦੇਖੜੇ ਕੋਈ ਨਹੀਂ ਹਾਂਜੀ ਚਪੇ ਲੋਕ ਵੀ ਇਹਨਾਂ ਦੇ ਕੋਈ ਧਾਰਮਿਕ ਲੋਕ ਵੀ ਇਹਨਾਂ ਦੇ ਕੋਈ ਨਹੀਂ ਧਾਰਮਿਕ ਠੀਕ ਹੈ ਸਰਵਰ ਸਾਡੋ ਜੀ ਜੇ ਤੈਸੇ ਦੂਸਰ ਦੇ ਕੋਈ ਨੰਤਾ ਸੌਣ ਕਰਦੇ ਨੰਤਾ ਥਕੀ ਕਰਦੇ ਨੰਤਾ ਹੋਇਆ ਕਰਦੇ ਨੰਤਾ ਬਕਬਕ ਕਰਦੇ ਜੀ ਕਿਹਦੇ ਵਿੱਚ ਕੋਈ ਦੇਖ ਵੀ ਜੀ ਦੇਖ ਵੀ ਜੀ ਕੋਈ ਜੇ ਇਹ ਨਾ ਹਰ ਪਾਏ ਠੀਕ ਹੈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤੈਨ ਅੰਮ੍ਰਿਤ ਪਲ ਹਰ ਪਾਏ ਜੀਰਾਂ ਪਰ ਮੁਕਾਲੇ ਪਰ ਬੀਜਿਆ ਜੀਰਾਂ ਅੰਮ੍ਰਿਤ ਬੀਜਿਆ ਆਪੇ ਪੁਰੋਵਰ ਤੇ ਪਰਲਵ ਜਾਂਦੇ ਨੇ ਉਹਨਾਂ ਹਲਤ ਪਲਤ ਮੁਖ ਉਜਲੇ ਕੋਈ ਹਰ ਦਰਗਾ ਸੱਚੀ ਪਹਿਨਾਏ ਹਰਤਾਸ ਸਾਰ ਜਿੱਤੇ ਸਭ ਹੋ ਜਾਂਦੇ ਕੋਈ ਨਹੀਂ ਹਾਂ ਦੇ ਅੰਦਰ ਬਹਿਵਾਂ ਦੇ ਪਿੱਛੇ ਦੇ ਵਿੱਚ ਬੈਣ ਆਏ ਜਾਂਦੇ ਨੇ ਬੁਤੀ ਤੇਜ਼ ਹੋ ਜਾਂਦੀ ਤੇਜ਼ ਬੁਤੀ ਹੋ ਜਾਂਦੀ ਉਹਨਾਂ ਹਰ ਦਰਗਾਹ ਦੀ ਹਰ ਤੇ ਵਿੱਚ ਸ਼ਬਦ ਦੀ ਸੁਣਦੇ ਸਦੇਵ ਜੀ ਬੁਧੀਰਾ ਅਦੇ ਲੋ ਸ਼ਬਦ ਦੀ ਸੁਰ ਤੇ ਬੁਧੀ ਉਰਦੀ ਤੇਜ਼ ਹੁੰਦੀ ਰਹਦੀ ਜਿਨਾ ਅੰਦਰ ਖੋਟ ਨਿਤ ਖੋਟ ਕਮਾਵੈ ਉਹ ਵਰਖੋਟ ਫਿਟ ਹੋੜ ਕਰਾਵੇ ਉਹ ਖੋਟ ਖੋੜੀ ਕਉਲੀ ਕਰਦੀ ਉਹ ਜੇ ਆ ਵੀ ਜੇ ਸਿਆ ਭਰ ਬਾਈ ਨੂੰ ਰਹੀ ਅਭਰ ਕਰ ਜਾਂਦਾ ਬੁਣਾਉ ਆਇਆ ਕਰਦੇ ਆਇਆ ਤਾਂ ਉਗੜ ਆਈ ਜਾਦੋਂ ਦੇਖਦਾ ਉਹਦਾ ਛਾਤੀ ਮਾਰ ਕੇ ਵੇਖਦਾ ਕੀ ਐਸਾ ਕੋਟ ਹੈ ਨਾ ਪੜੋ ਨਾ ਤਾਂ ਦੇਖੇ ਸੁਹਾਗੀ ਹਾਂਜੀ ਸੁਆਗਤ ਵਾਸਤੇ ਜੋ ਉਰਜਾ ਪਾਇਆ ਹੋਇਆ ਉਹ ਸਾਰੇ ਸਵਾਰਥ ਪ੍ਰਗਟ ਹੋ ਜਾਂਦੇ ਨੇ। ਕੋਈ ਜਿਹਾ ਚਿਤਵੈ ਨਿਤ ਤੇਹਾ ਪਾਇਨ ਪ੍ਰਾਪਤੀ ਹੋ ਜਾਂਦੀ ਹੈ। ਕੋਈ ਤੇਹੋ ਜੇ ਆਇਓ ਬੋਲੀਆਂ ਦੇ ਵਜਾ ਵਜਾਈ ਜਾ ਕੋਈ ਜਲ ਕਰੀ ਜਾਂਦਾ ਹੈ ਉਹਨਾਂ ਨੇ ਪੱਤੀ ਪਾ ਕਰੀ ਜਾਂਦਾ ਨਾਨਕ ਦੁਹੀ ਸ੍ਰੀ ਖਸਮ ਆਪੇ ਵਖਤਾ ਨਿਤ ਕਰ ਦੇਖ ਚਲਤ ਸਬਾਈ ਕਿਆ ਹੈ ਕੋਈ ਬੁਰਾ ਲੋਕ ਕੋਈ ਹੈ ਕਿਆ ਹੈ ਕੋਈ ਬੁਰਾ ਮੁਖ ਹੈ ਹਮਮਾ ਸੋਲਵਾ ਕਰ ਜਾਂਦੇ ਕਰਾਹੋਂ ਲੱਭਦੇ ਵਰਤਦਾ ਹੈ ਸਾਥ ਹੋਈ ਕਰਦਾ ਹੈ ਕਿਹਨੇ ਖੋਤੇ ਨੂੰ ਖਰਿਆਂ ਦੀਆਂ ਕਿੰਨਾਂ ਜਾਂਦਾ मोहल्ला चौथा एक मन एक व्रत दा जिथे सो थाएं पाए कोई गलना करे कनेरिया जे घर व्रत होवे ताई खाई चलाए कमाने को सो ਜਾਵੇ ਜਾ ਜੇ ਤਕਤੀ ਨੂੰ ਕਹੋਂ ਤੋ ਜੇ ਜਾ ਗਰ ਨਾ ਲਵਸ ਤੋ ਗਿਆਨ ਹੋਏ ਹੋਊਗਾ ਆ ਆਖੀਏ ਜੇ ਜਾ ਬਚਾਰਿਆ ਉਹਦੀ ਮਤ ਬੁੱਝਣੀ ਨੂੰ ਜਿਹੜਾ ਇੱਕ ਮਾਨੇ ਕੇ ਤਕਰੀਰ ਹੈ ਨਾ ਤੇ ਉਹਦੀ ਗੱਲ ਹੈ ਉਹ ਗੱਲਾਂ ਹੀ ਕਰਦੇ ਨੇ ਤਨੇਰੀਆਂ ਇਦੋਂ ਉਹਦੀ ਗੱਲਾਂ ਮਹਰੀਂ ਕਰਦੇ ਨੇ ਪਰ ਸਾਡੇ ਕਿੰਨੂ ਨੂੰ ਗੱਲ ਸਾਡੇ ਸਾਡੇ ਕਦੀ ਬੋਲਦੇ ਆ ਵੀ ਨਾ ਕੋਲ ਸੱਚੀ ਦਾ ਸੱਚ ਦਾ ਬਿਆਨ ਨਹੀਂ ਕਰ ਸਕਦੇ ਠੀਕ ਹੈ ਗੱਲਾਂ ਬਹੁਤ ਸਾਖੀ ਬਿਠਾ ਜੂ ਆਪਣਾ ਟਾਈਮ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਹੰਦੈਂ ਘਰ ਘਰ ਮੰਗਾਈ ਸਤਗੁਰੂ ਦੀ ਸੋਚੀ ਨੂੰ ਬਗੈ ਸਤਗੁਰ ਤੇ ਸਤਗੁਰ ਦੇ ਨਾ ਦਿਲੇ ਤੇ ਬਣਾ ਸੋਚੀ ਦੀ ਬੈਸਤ ਸੋਚੀ ਦਾ ਜਦੂਰ ਕੋਈ ਨਹੀਂ ਹੈ ਹੰ ਨਾਲ ਜੁੜਿਆ ਰਹੇ ਤਾਂ ਉਹਦੀ ਪ੍ਰਕਿਰਿਆ ਤਾਂ ਹੈ ਤਾਂ ਕਾਰ ਨਾਲ ਬਚੋ ਜਾਏ ਮਿੱਤਰ ਬੁਕਾਰ ਜੋ ਰੋਕ ਰਖ ਰਿਹਾ ਆਪਣੀ ਬੁੱਧੀ ਬੱਕਰੀ ਰਖ ਰਿਹਾ ਆਪਣੀ ਬੁੱਧੀ ਨਾਲ ਅਦਾ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੰਡੇ ਹਨ ਘਰ ਘਰ ਮੰਗਾਂ ਹਾਂ ਜਿਹੜੇ ਹੰਕਾਰੀ ਨੇ ਦੁੱਖ ਭੁੱਖ ਤਾਂ ਇਹਦੇ ਹੋਈ ਹੈ ਕਦੇ ਬੜੀਆਂ ਬੜੀਆਂ ਕਾਰਾਂ ਦੇ ਕਦੇ ਵੀਰ ਵੀਰ ਬੜੇ ਬੜੇ ਮਹਿਰ ਵੀਰ ਫੈਗੋ ਬੁਖਰੇ ਫੈਲਣ ਇਹ ਆਦੇ ਹੰਕਾਰੀਆਂ ਨੇ ਸਿੱਧੇ ਹੋਈ ਹੈ ਬਰਬਾਦ ਹੋ ਭੁੱਖ ਹੈ ਫਸਤ ਤਸਨਾ ਕਰ ਕਰ ਮਨ ਆਏ ਕਰ ਕਰ ਬੁਲੇ ਦੇ ਹੱਥ ਚੜਦੇ ਕੋਈ ਕਹਿਣਾ ਕੋਈ ਨਾ ਬਿਆਨ ਨਹੀਂ ਕੋਈ ਕਹਿਣਾ ਕੋਈ ਕਰ ਕੋਈ ਉਹ ਤਾਂ ਟੈਕਨੀਕ ਆ ਨਹੀਂ ਜੀ ਬੁਦਦਿਆ ਤੇਰੀ ਘਰੇ ਮਨ ਤੁਸ਼ਾਇਆ ਲਗਾ ਮੈਂ ਤੇਰੇ ਕੋਲ ਬੁਲੇ ਰਖੋ ਤੇ ਟੈਕਨੀਕ ਆਉਣੀ ਆਂ ਜਾਨੇ ਕਹੋ ਬੁਦਦਿਆ ਪਰ ਆਏ ਗੁਰ ਠੱਗੀ ਗੁੱਜੀ ਨਾ ਰਹੇ ਮੋ ਲੰਮਾ ਪਾਜ ਲਹਿ ਜਾਏ ਜਿਜ ਹੋਵੇ ਪੁਰਬ ਲਿਖਿਆ ਤੇ ਸਤਗੁਰ ਮਿਲੇ ਪ੍ਰਭ ਆਏ ਕਦੇ ਬੁਢੇ ਨਾ ਰਹੇ ਜੇ ਮਰਜੀ ਤੋਂ ਬੋਲਣ ਚੌ ਉਡੀਕੀ ਗੋਲੀ ਨਹੀਂ ਲੜੀ। ਜੇ ਗੋਲੀ ਨਾਲ ਹੋਣੀ ਗੱਲ ਨਹੀਂ ਆ। ਇਹ ਨਾਮ ਤੋਂ ਹਟੇ ਲੋਕਾਂ ਨੇ ਮਾਇਆ ਥਾਡੀ ਦੇ ਸਾਰੇ। ਗੋਲੀ ਨਾਲ ਕੋਈ ਗੱਲ ਨਹੀਂ ਆ ਕਿਉਂ। ਕੋਲ ਬੰਦਾ ਮਾਇਆ ਬਲਬੇ ਉੱਤੇ ਰਹੀ ਹੈ। ਜਿਸ ਹੋਵੇ ਪੁਰਬ ਲਿਖਿਆ ਤੇ ਸਤਗੁਰ ਮਿਲੇ ਪ੍ਰਵਾਹ ਜਿਸ ਹੋਵੇ ਪੁਰਬ ਇਹna ਪਹਿਲੇ ਲਿਖਿਆ ਹੋਵੇ ਜੋ ਕਿਹੜੇ ਰਾਹ ਜਾਣਾ ਹੈ ਮੇਰਾ ਟਾਰਗੇਟ ਕੀ ਹੈ ਪ੍ਰਾਪਤੀ ਕੀ ਕਰਨੀ ਹੈ ਉਹ ਟਾਰਗੇਟ ਬਦਲੇ ਟਾਰਗੇਟ ਰੱਖੇ ਉੱਤੇ ਟਾਰਗੇਟ ਬਦਲਦੇ ਹੋਣ ਹੰਦੀਆ ਸਾਹਿਬ ਜੀ ਜੀ ਜੇਵਨਾ ਨੂੰ ਦੇ ਜੇਵਨਾ ਵਰਗਾ ਯੋਜਨਾ ਟਾਰਗੇਟ ਬਦਲ ਲਵੇ ਫੈਰਾਣ ਲਿਖਿਆ ਹੁੰਦਾਈ ਆ ਚੱਲੇ ਤੇਰ ਮੈਨਨ ਕੋ ਚੱਲੇ ਤੇਰ ਮੈਨਨ ਕੋ ਚੱਲੇ ਤਾਂ ਸਾਰੇ ਮੈਨਨ ਕੋ ਤੇ ਵਿਚੇ ਅੜ ਗਿਓ ਚੀਤ ਉਹ ਦੁਨਿਆਵ ਦੇਖ ਕੇ ਤੇ ਟੱਕ ਗਿਆ ਬੇਸਲਾ ਡਾਲੀ ਵੀ ਇਹਨਾਂ ਦਾ ਕਬੀਲਾ ਜੇ ਬੇਸਵਾ ਨਾ ਕਰੇ ਟਾਰਗੇਟ ਹੋਣੀ ਰੱਖੇ ਫਿਰ ਜਿਹੜੇ ਤੇ ਫੋਨ ਕਰਦੇ ਫਿਰ ਆਪਰੇ ਕਰਦੇ ਜੀ ਜੀ ਜਿਉ ਲੋਹਾ ਪਾਲਸ ਭੇਟੀਐ ਮਿਲ ਸੰਗਤ ਤੁਲਣ ਜੇ ਨਾਨਕ ਕੇ ਪ੍ਰਭ ਤੂੰ ਢਣੀ ਜਿਉ ਭਾਵੈ ਤਿਵੇ ਤਲਾਈ ਜਿਉ ਲੋਹਾ ਪਾਲਸ ਭੇਟੀਐ ਮਨ ਤੁਹਾਰੇ ਜੋ ਜਨ ਹੈ ਵੀ ਸੰਗਤ ਸਰਣ ਹੋਇ ਜਾਏ ਐ ਸੰਗਤ ਕੁਤਿ ਮਿਲ ਕੇ ਆਪਣੇ ਅਰਤਨ ਨਾਲ ਮਿਲ ਤੇ ਚੋੜਾ ਵੜਿਆ ਤੇ ਬਨ ਸਰਣ ਵੱਲ ਜਾਵੇ ਲੋਹਾ ਜੀਰਨ ਹੋਏ ਜਿਵੇਂ ਪਾਸ ਤੇ ਬਿਖੇ ਨਾ ਸ੍ਰਿਦਰ ਉਹਦੇ ਜਲਦੀ ਰਾਸ ਹੈ ਸ਼ਰਧਾ ਦਾ ਜਨ ਹੈ ਲੋਹਾ ਹੈਗਾ ਮਨ ਦਾ ਪ੍ਰਤੀਕ ਤੇ ਪਾਰਸ ਹੈਗਾ ਸਤਗੁਰ ਦਾ ਪ੍ਰਤੀਕ ਹੈ ਜੀ ਜਨ ਨਾਨਕ ਕੇ ਪ੍ਰਭ ਤੂੰ ਧਣੀ ਜਿਉ ਭਾਵੈ ਤੇ ਵਚਲਾ ਪ੍ਰਭ ਜਨੂ ਦਾ ਮਾਲਕ ਤਾ ਤੂੰ ਜੀਵ ਦਾ ਮਾਲਕ ਕਿਉਂ ਬਾਰੇ ਕਿਵੇਂ ਚੱਲੇ ਦੂਸਰੇ ਬੇਲੋੜਾ ਉੱਪਰ ਆਪਾਂ ਇੱਕ ਪਹਿਲੇ ਸ਼्लोक ਦੀ ਪਿੱਕਣਾ ਅੰਦਰ ਖੋਟ ਨਿਤ ਕੋਟ ਕਮਾਵੇ ਉਹ ਜਿਹੜਾ ਬੀਜੇ ਤੇ ਆ ਫਲ ਖਾਏ ਲਿਖਿਆ ਇਹ ਠੀਕ ਲੱਗਦਾ ਜੀ ਫਲ ਖਾਏ ਹੋਏਗਾ ਫਲ ਪਾਏ ਹੈ ਅੱਛਾ ਜੀ ਕਾਇ ਤੋਂ ਮਿਲੂ ਅੱਛਾ ਜੀ ਹਾਂ ਕੋਈ ਖਾਣ ਵਾਲਾ ਜ਼ਿਆਦਾ ਨਹੀਂ 1:00 ਵਜੇ ਰਹਿ ਇੱਥੇ ਅੱਛਾ ਤੋ ਵੀ ਜਿੱਦੇ ਆਇਆ ਇਹਨਾਂ 1:00 ਵਜੇ ਈ ਗੱਲ ਹਾਂ ਕੋਈ ਖਾਣ ਵਾਲਾ ਜ਼ਿਆਦਾ ਨਹੀਂ ਹਾਂ ਹਾਂ ਹੋਏਗਾ ਕਿ ਹੋਏਗਾ ਖਾਏ ਹੋਏਗਾ ਹਾਂ अच्छा। ਕਿਹ ਜਿਹੇ ਪ੍ਰਾਪਤ ਕਰ ਲਈ ਉਹਦੇ ਜ਼ਹਿਰ ਨਹੀਂ ਕਰਦੀ। اچھا। ਖਾਣੀ ਪੈਂਦੀ। ਇਹ ਨਾਮ ਦਾ ਫਲ ਸਾਈਂਦਾ ਰੰਗ ਨਹੀਂ ਕਰਦਾ। ਆਪ ਵੀ ਨਾ ਕੁਝ ਨਹੀਂ ਹੁੰਦਾ ਹੈ। ਹੂੰ ਹੂੰ। ਕੰਪੀਅਰ ਗਲ ਵੀ ਪ੍ਰਾਪਤ ਹੋ ਗਿਆ। ਠੀਕ ਵੀ ਪ੍ਰਾਪਤ ਹੋ ਗਿਆ। ਹੂੰ ਹੂੰ। ਅੱਛਾ ਠੀਕੋ ਭਾਬੇ ਦੇਖੋ है ਠੀਕ ਹੈ ਇਹ ਕੁਛ ਬੀੜਾਂ ਵਿੱਚ ਪਾਏ ਲਿਖਿਆ ਹੋਇਆ ਕੁਛ ਖਾਏ ਲਿਖਿਆ ਹੈ ਤੇ ਇਹ ਇੱਥੇ ਖਾਏ ਠੀਕ ਹੈ ਜੀ ਖਾਏ ਜੀ ਠੀਕ ਹੈ ਜੀ ਜਦੋਂ ਪ੍ਰਾਪਤ ਕਰਦੇ ਹੀ ਲਵੇ ਭਾਬੇ ਨੂੰ ਫਿਰ ਠੀਕ ਹੈ ਤੇ ਅਜਲਤਾ ਬੋਈ ਦੀ ਠੀਕ ਹੈ। ਕੌੜੀ ਜਿਨ ਹਰ ਹਿਰਦੇ ਸੇਵਿਆ ਤਿੰਨ ਹਰ ਆਪ ਮਿਲਾਏ ਗੁਣ ਕੀ ਸਾਂਝ ਤਿੰਨ ਸਿਉ ਕਰੀ ਸਭ ਆਗਨ ਸ਼ਬਦ ਜਲਾਏ ਜਿਨ ਹਰ ਹਿਰਦੇ ਸੇਵਿਆ ਜਿਨ ਹਰ ਹਿਰਦੇ ਵਿੱਚ ਹਰ ਹਰ ਉਦੀ ਸੇਵਾ ਕੀਤੀ ਹੈ ਉਹਦਾ ਵਚਨ ਗੁਰੂ ਦੇ ਅਨੁਸਾਰ ਰਹੇ ਰੱਬੋ ਦੇ ਵਾਲਿਓ ਖਾ ਚਲੇ ਨੇ ਤਿੰਨ ਹਰ ਆਪ ਮਿਲਿਆ ਤਿੰਨ ਹਰ ਆਪ ਮਿਲਾਏ ਆਪ ਬੁਲਾਏ ਪਰ ਹਰ ਆਪ ਬਣਾ ਲੈਂਦਾ ਛੱਡ ਲੈਂਦਾ ਵਿਆਜੋ ਮੇਰੇ ਕੋਲੇ ਆਜੋ ਭੇਜੋ ਆਪ ਹੀ ਬੁਲਾ ਲੈਂਦਾ ਆਪਣੇ ਗੁਣ ਕੀ ਬਾਣ ਤਿੰਨ ਕਿਉ ਕਰੀ ਸਭ ਅਗਣ ਸ਼ਬਦ ਹਾਂਜੀ ਤਿੰਨ ਕਿਉਂ ਕਰੀ ਹਾਂਜੀ 2 ਕਿਉਂ ਕੀਤੀ ਉਹਨਾਂ ਦੇ ਨਾਲ ਗੁਣਤੀ ਸਾਂਝ ਕਰਦੇ ਅੱਛਾ ਜੀ ਆਪਣੇ ਕੋਲੋਂ ਨਾ ਮੇਰੇ ਦੱਸ ਉਹਨਾਂ ਦੇ ਉਪਨ ਛੇਡਾ ਦਿੰਦੇ ਉਹਨਾਂ ਦੇ ਉਪਨ ਛੇਡਾ ਕੇ ਆਪਣੇ ਕੋਲ ਦੇ ਦਿੰਦੇ ਅੰਦੇ ਕਰਦੇ ਕੋਲ ਮੈਂ ਉਹਨਾਂ ਸ਼ਬਦੀ ਜਲਾਏ ਹਾਂ ਉਹਨਾਂ ਸ਼ਬਦ ਲੈਣ ਨਾਲ ਉਹ ਐਸਾ ਉਦੇਸ हाले होजन ने, ने।, ने। विकण पल्लवी जिस देह सो सच्चे पाए बलहारी गुरु अपने जिन ओगण मेट गुण प्रगटी आए वड्डी वडयाई वड्डे की गुरुमुख आ लाए ਹਾਂ ਇਹ ਲੋੜ ਹੁੰਦੀ ਇੱਛਾ ਕਰਦੀ ਉਹ ਬੜੀ ਪਰ ਇਹਨਾਂ ਤੋਂ ਸੰਤੋਖ ਨਹੀਂ ਉੱਗੜਦੇ ਠੀਕ ਹੈ ਜੀ ਜਦੋਂ ਸੂਰਜ ਪਾਉਂਦੇ ਫੇ ਚਾਨਣ ਪ੍ਰਾਣੀ ਛੱਡਦੇ ਨੇ ਛੱਡ ਕੇ ਤਾਂ ਉਹ ਤਾਂ ਥੱਲੇ ਹਸਣ ਲੱਗੀ ਹਾਂ ਹਾਂ ਉਹ ਤਾਂ ਥੇਰੇ ਦੀ ਤੱਤੀ ਹਾਂ ਜੀ ਨਾਲ ਹੀ ਐਡ ਕਰਦੇ ਸਰੀਰ ਦੇ ਹੀ ਐਡ ਕਰਦੇ। ਠੀਕ ਹੈ। ਪਰ ਉਹ ਦੇ ਭਾਰੇ ਹੋਇ। ਹੂੰ। ਉਹ ਜ ਬੋਲਣਾ ਬੋਲੋ ਦੇ ਵਿੱਚ ਆ ਉਹ ਗਣਥੇ ਸਰਦਦੇ। ਸਰੀਰ ਦੇ ਨਾਲੇ ਥੱਲੇ ਉਹ ਬਣ। ਸਰੀਰ ਨੇ ਉੱਥੇ ਹੀ ਉੱਪਰ ਸਰਦਦੇ। ਸਰੀਰ ਰੋੜਾ ਸਰੀਰ ਦੋਨਾ ਠੀਕ ਹੈ ਜੀ ਜਿਹਦੇ ਗੁਪਤ ਹੈ ਦੇਹ ਨੂੰ ਜ਼ਿਆਰੀ ਆਈ ਹੋਈ ਹੈ ਗੁਪਤ ਹੈ ਦੇਹ ਨੂੰ ਗੁਪਤ ਹੈ ਨਹੀਂ ਪਲਣੀ ਸੀ ਵਿੱਚ ਜੀ ਸੀ ਜੀ ਉਹ ਤਾਂ ਸੀ ਉਹ ਲੈ ਲੈ ਉਹ ਤੇ ਸੀ ਉਹ ਕਰਾ ਲਿਆ ਦੁਨਿਆਵਲ ਚੋਂ ਥਲੇ ਜੀਨ ਉਹ ਖਰੇ ਕਰੀ ਅੰਦਰ ਪਰਾਲੀ ਥਲੇ ਸੁਟੀ ਜਾਂਦੇ ਹੂੰ ਕੀ ਗੱਲੀ ਬੰਲਾ ਹਾਰੀ ਗੁਰ ਆਪਣੇ ਜਿਨ ਔਗਣ ਗੁਣ ਪ੍ਰਗਟਿਏ ਆਏ ਫਰਿਆੜੀ ਗੁਰ ਆਪਣੇ ਜਿਨ ਔਗਣ ਵਟਾਉਂਦੇ ਆ ਉਪਰ ਆਪੇ ਵਟਾਉਂਦੇ ਉਹ ਬਣਾ ਦਤਾ ਹੈ ਉਹ ਕੜੂਰ ਦਾ ਤਿਆਰ ਕਰਤਾ ਪ੍ਰਾਣੀ ਨੂੰ ਦਾਣੇ ਐਡ ਕਰ ਲੈ ਠੀਕ ਹੈ ਫਿਰ ਇਹਨੂੰ ਆਟਾ ਮਾਰ ਵੱਡੀ ਵਡਿਆਈ ਵੱਡੇ ਕੀ ਗੁਰਮੁਖੀ ਅਲਾਇ ਵੱਡੇ ਦੀ ਵਡਿਆਈ ਠੀਕ ਹੈ ਉਹੋਂ ਕੰਟੜਾ ਜਣਾ ਉਹਦੀ ਹੋੜਿਆ ਇਸ ਤਹੀਏ ਗਰਮ ਕਰੇ ਉਲੀ ਵੜੀ ਆਈ ਹੋੜੀ ਹੋਰ ਕਹੇ ਪ੍ਰਭੂ ਬਿਸ਼ੂ ਸ਼ਿਵ ਜੀ ਦੇ ਵੀ ਦੀ ਹੋੜਿਆ ਇਦਿਕਈ ਜੇ ਜੋ ਉਪਜਿਆ